ਰਤਨ ਤੇ ਹੈ ਕੌਡੀ ਸੰਗ ਰਚਿਆ ਰਤਨ ਤੇ ਗਿਆ ਹੈ ਕੌਡੀ ਨਾਲ ਗਿਆ ਰਤਨ ਕੀ ਅੰਤਰਰਾਸ਼ਟਰੀ ਵਾਜਦ ਕੋਲ ਰੋਕੋ ਜੀਦਾ ਇਹਨੂੰ ਰੰਗ ਚੜਨਾ ਨਾ ਉਹਦੀਆਂ ਰੰਗ ਚੜ੍ਹ ਉਹ ਅੰਤਰਰਾਸ਼ਟਰੀ ਵਾਜਦ ਨੂੰ ਜ਼ਿੰਦਗੀ ਬਤਾਵੇ ਇਹਨੂੰ ਸਾਰੇ ਦੇਵਤਾ ਕਹਿੰਦੇ ਤਾਂ ਦੇਵਤੇ ਦੀ ਵਾਜਾ ਦੇ ਬੱਠਾ ਕਰੋ ਤਾਂ ਵੀ ਦੇਵਤਾ ਹੈ ਜੋ ਹੋਰ ਕੋਈ ਗਿਆਨ ਦੀ ਅੰਤਰਰਾਸ਼ਟਰੀ ਵਾਜ ਨਾਲ ਵੀ ਸਾਰੇ ਫੈਸਲੇ ਲਵੇ ਵਰਤੇ ਲੋਕਾਂ ਦਾ ਤਾਂ ਵੀ ਦੇਵਤਾ ਤੇ ਉਹ ਤਾਂ ਦੇਵਤਾ ਬਣਾ ਤਾ ਨੇ ਰਤਨ ਉਹ ਤੋਂ ਬਿਥਾਰਿਆ ਫਿਰ ਕਿਹਾ ਹੋਰ ਤੈਨੂੰ ਮਿਲ ਗਿਆ ਤਾਂ ਫਿਰ ਉਹ ਤਾਂ ਸੋਨੇ ਤੇ ਹੋ ਜਾ ਫਿਰ ਆਪੇ ਵੀ ਸੋਧੀਆਂ ਆਉਂਦੀ ਰਹਿੰਦੀਆਂ ਕਈ ਗੱਲਾਂ ਸੁਣਦਾ ਉਹਨੂੰ ਵਿਚਾਰ ਲੈ ਚ ਵਿਚਾਰ ਪਾਸੇ ਬਹਿ ਜਾਂਦਾ ਰਤਨ ਤੇ ਕੌਡੀ ਸੰਦਰਾ ਚ ਕੌਡੀ ਕੀ ਬਾਤ ਮੈਂ ਆ શરીર ਵੀ ਕੌਡੀ ਹੋਇਆ पहले तो ਹਾਲੇ ਜੀ ਨਾਲ ਲੱਗਿਆ ਹੋਇਆ ਇਹ ਕੌਡੀ ਹੋਈ ਹੈ ਚਲੋ ਵਾਂ ਫਿਰ ਕਹਾਂ ਦੀ ਕੌਡੀ ਹੋਈ ਹੈ ਸਾਰੀ ਮਾਇਆ ਕੌਡੀ ਹੈ ਲੈ ਕੇ ਸ਼ਰੀਰ ਤੋਂ ਜਿੰਨੀ ਮਾਇਆ ਸਭ ਕੌਡੀ ਹੈ ਹਾਂ ਸੱਚ ਛੋੜ ਛੂਟ ਸੰਗ ਬਚਿਆ ਸੱਚ ਛੱਡਿਆ ਹੋਇਆ ਛੂਟ ਆ ਗਣੇ ਮਾਇਆ ਛੂਟਿਆ ਰ ਮਾਇਆ ਜਬਤ ਕੋ ਜਾਈ ਉਹ ਅਗਮੀ ਤਸਰਨਾ ਕਹੀ ਉਹਦੇ ਨਾਲ ਮੱਚਾ ਮੱਚਾ ਮੱਚਾ ਸਰ ਅਸਰ ਪਾਪੜ ਮਾਜਦਾ ਤੇ ਕ੍ਰਿਸ਼ਨੋਂ ਦਾ ਪਾਪੜ ਮਾਜਦਾ ਚਾਰ ਨਦੀਆਂ ਅਗਰੀਆਂ ਪੈਦਾ ਹੋ ਗਈ ਲੋ ਹੰਸ ਸਹੇਤ ਲੋਭ ਕੋਪ ਚਾਰੇ ਨਦੀਆਂ ਆ ਗਏ ਕੋਈ ਕਰਦਾ ਉਹ ਤੇ ਗਰੋਜ਼ ਆ ਜਾਂਦਾ ਜੇ ਕੋਈ ਕੰਮ ਨਹੀਂ ਬੰਦਾ ਤਾਂ ਗੁੱਸਾ ਆ ਜਾਂਦਾ ਆਪਣੇ ਗ੍ਰੋਧ ਤੇ ਕੋਸਮ ਲਾਉਂਦਾ ਹਿੱਸਾ ਕਰ ਦਿੰਦਾ ਜਦ ਬੋਧ ਵਿੱਚ ਆ ਕੇ ਵੀ ਕਤਲ ਕਰ ਦਿੰਦਾ ਉਹ ਬਾਤ ਹੋ ਗਈ ਗ੍ਰੋਧ ਦੇ ਬਾਰੇ ਹੰਸ ਸਹੇਤ ਲੋਕ ਨੂੰ ਆਪਣਾ ਹਿੱਤ ਹੈ ਜਿੱਥੇ ਹਿੱਤ ਆਪਣੇ ਹਿੱਤ ਵਾਸਤੇ ਕਤਲ ਕਰ ਦਿੰਦੇ ਆਪਣੇ ਜਿਵੇਂ ਰਾਜੇ ਰਾਜਿਆਂ ਨੂੰ ਕਰਨ ਕਰਦੇ ਆਪਣੇ ਭਾਈ ਨੂੰ ਰੰਦੇਵ ਵਗੈਰਾ ਆਪਣੇ ਬਾਪ ਨੂੰ ਇਸ ਬਾਸੇ ਮਸੇ ਜੋ ਛੱਡਣਾ ਸੋ ਅਸਰ ਕਰ ਮੰਨੇ ਜੋ ਛੱਡਦੇ ਨੇ ਸਰੀਰ ਬਾਹਰ ਦਾ ਕੋਈ ਛੱਡਣਾ ਸੋ ਅਸਰ ਕਰ ਮੰਨੇ ਉਹ ਭਾਈ ਮੰਡਲ ਲਗਾਏ ਮੰਡਲ ਮੇ ਆਏ ਸੀ ਤੋ ਤਾਂ ਇਹ ਲਗਾ ਕੇ ਲੱਗੇ ਆਏ ਹੈ ਬਹੁਤ ਲੋਕ ਦੇ ਬਾਟਰ ਲਖਾਏ ਬੁਲਟਲ ਮੇ ਆਏ ਦੇ ਬ੍ਰੋਟਲ ਚਾਹਿਆ ਮਾਣ ਰਖਾ ਕੇ ਬੱਜੇ ਚਾਹਣਾ ਜੀਵਨ ਜੇ ਕਿਉਂ ਨਾ ਕਿ ਜੀਵਨ ਰਹੇ ਮੇਰਾ ਸਾਥ ਜੀਵਨ ਭੁਜਵੇਂ ਜੀਵਨ ਸਾਜੇ ਮਾਈ ਤੇਰਾ ਭਾਈ ਹੈ ਵਰਮਾ ਤੇ ਸਾਜੂ ਵੀ ਜੀਵਨ ਇਹ ਇਹ ਪਹਿਲਾ ਇਹਦਾ ਸਖਿਆ ਸ੍ਰੀ ਨਿਰਾਣਾ ਜੇ ਜੀਵਨ ਸਾਜੇ ਸਾਜਣਾ ਤਾਂ ਜੀਵਨ ਸਾਜੇ ਮਾਈ ਆਹ ਨਹੀਂ ਦੂਈ ਬਾਹਣਾ ਉਹ ਬਾਹਣਾ ਦਾ ਸਰੀਰ ਰਹਿਦਾ ਸਾਡੀ ਪੈਰੀਂ ਉਨੇ ਦਾ ਉਹ ਨਿਹਰ ਵਾਸਤੇ ਦਿੱਤਾ ਜੀ ਉਹ ਸਰੀਰ ਤੋਂ ਡੋਹ ਲਈ ਸੀ ਆ ਜਿਹੜੀ ਮਾਰੀ ਆ ਪਰਮਨੈਂਟ ਸਰੀਰ ਦਾ ਅੰਤਰਾਤ ਹੁੰਦਾ ਹੈ ਜਿਹੜਾ ਅੰਤਰਾਲਾ ਸਰੀਰ ਹੈ ਕਿ ਉਹ ਸਾਜਣ ਉਹ ਸਾਜਣ ਨੂੰ ਤਾਂ ਕੁਝ ਵੀ ਨਹੀਂ ਉਹ ਉਹ ਨੀਂਦ ਉਹ ਬੰਦ ਹੁੰਦੀ ਜਿਹੜੀ ਸੌਦਾ ਹੈ ਉਹ ਸਾਜਣਾ ਕੀ ਆ ਤਾਂ ਸਮਝਾ ਦੂ ਮਰ ਜਾਂਦਾ ਜੀਵ ਨੇ ਤਾਂ ਜੀਵ ਨੇ ਬੰਦ ਕਰਦੀ ਇਹਨਾਂ ਤੇ ਆਲਮਿਕ ਤੋਂ ਜੁੜਦਾ ਉਹ ਤੋਂ ਹਿਲਣਾ ਹੀ ਨਹੀਂ ਪਾਉਂਦਾ ਜੋ ਜੀਵਨ ਸਾਜਿਆ ਗਿਆ ਚਾਰ ਘੜ ਤੋਂ ਬਿਨਾਂ ਤੇ ਹਮਸਾ ਦਾ ਦਾ ਕਰਕੇ ਜੀਵਨ ਨਹੀਂ ਇਹਦਾ ਹੌਸਲ ਤੇ ਅੰਤ ਨਹੀਂ ਅੰਤ ਜਦ ਤੇ ਹਮ ਇੱਕ ਤੋਂ ਹੋ ਜਾਊਗਾ ਕਿਥੋਂ ਟਿਕਿਆ ਰਹੂਗਾ ਫੇਰ ਦੀਦ ਨਹੀਂ ਆਉਂਦੀ ਜਦ ਤੱਕ ਉਹ ਜਿਆ ਤੱਕ ਸਦਾ ਧਿਆਨ ਬੋ ਇਧਰ ਇਧਰ ਇਧਰ ਲੱਗਦਾ ਅਸਲ ਵਿੱਚ ਤਾਂ ਜਦੋਂ ਧਿਆਨ ਕਿੱਜਦਾ ਹੈ ਉਦੋਂ ਤਾਂ ਬਰਾਬਰ ਹੋਊਗਾ ਸੁੱਤਾ ਜਾਗਦਾ ਬਰਾਬਰ ਹੀ ਹੁੰਦਾ ਨਾ ਉਹ ਜਾਗਦਾ ਇਹਨੂੰ ਸੁੱਤਾ। ਨਾ ਜੋਗਾੜਾ ਬਰੇ ਉਹ। ਯਾਤਾਨਿਕ। ਜੇ ਜੀਵਨ ਹੈ ਤਾਂ ਬਾਂਗ ਨਹੀਂ ਹੈ। ਆਹ ਜਨਮਪੁੱਤ ਸਮਾਨੋ। ਸਮਾਨੋ। ਮਾੜੋ ਤੇ ਕੀ ਹੈ ਉਹ ਤਾਂ ਅੱਛਾ ਆਨੇ ਡੋਲ ਦੇ ਮੈਂ ਅਜੀ ਦੀਨ ਦੀ ਤਾਂ ਟੈਂਡ ਡੋਲ ਲੱਤੇ ਜਾਊਗੀ ਦੋਸੇ ਤੇ ਜਾਊਗੀ ਨੀ ਦਰ ਕਿ ਮੈਂ ਆਹੀ ਹੋਰ ਪਾਸੇ ਜਾਊਂ ਹੋਰ ਪਾਸੇ ਜਾਊ ਉਹ ਜੇ ਟੁੱਟੂਗੀ ਜਿੱਥੇ ਜੁੜੀ ਹੋਈ ਹੈ ਦੀਨੇ ਤੋੜੂਗੀ ਦੋ ਟਰੱਕ ਚਲਾਉਂਦਾ ਦੀਨੇ ਤੋੜ ਦਿਆ ਤਾਂ ਇਹ ਚਲੇ ਟੁੱਟਦਾ ਦੀਚਾ ਤੋੜਦੀ ਹੈ ਜੀ ਨੇ ਧਿਆਨ ਨਹੀਂ ਤੋੜ ਸਕਦੀ ਉਹ ਫਿਰ ਗੋੜੀ ਖਾਲੰਦਾ ਫਿਰਦੀ ਫੇਦੀ ਜਾਂਦੀ ਬੇਜੜਾ ਨਾਮ ਦਾ ਹੈ ਨਾ ਦੀ ਜਉਂਦੀ ਹੋਈ ਨਹੀਂ ਅਸੀਂ ਕਹਿੰਦੇ ਚੱਲ ਮੋਟਾ ਜਾ ਪਲ ਜਿਵੇਂ ਡਰਾਈਵਰ ਲੋਕ ਨੇ ਹੋਣਗੇ ਇਹ ਫਾਲਤੂ ਨੇ ਕਿੰਨੇ ਵੀ ਹੋਣਦੀ ਜਾਂਦੀ ਹੈ ਹੈ ਜੀ ਉਹ ਗੱਲ ਨਰੂਈ ਗੁਰਮਖਾਗਾ ਨੀਰਮਨ ਹੋਣਾ ਹਾਂਜੀ ਜੋ ਛੱਡਣਾ ਸੋ ਅਸਥਿਰ ਕਰ ਮੰਨਣਾ ਹੈ ਜੋ ਹੋਵਣ ਸੋ ਦੂਰ ਪਰਾਨਾ ਹੈ ਤੇ ਛੱਡਣਾ ਜਿਹੜਾ ਸਰੀਰ ਜੋ ਕੋ ਛੱਡ ਜਾਣਾ ਮਾਇਆ ਸਾਡੀ ਛੱਡ ਜਾਣੀ ਇਹਨੂੰ ਛੱਡ ਕਰਕੇ ਮੰਨਿਆ ਆ ਰਿਹਾ ਤਾਂ ਛੱਡ ਰਾਈ ਕੱਟ ਕੇ ਕਮ ਨਹੀਂ ਆਇਆ ਜੋ ਹੋ ਜੋ ਹੋਬਰ ਸੋ ਦੋ ਪੁਰਾਣੇ ਆ ਜੋ ਜੋ ਹੁਣਾ ਹੋਣਾ ਹੈ ਉਹ ਕਈ ਹੋਇਆ ਕੀ ਬੋਲਿਆ ਪੈਣਾ ਆ ਆਸਰ ਦਾ ਕੰਮ ਕਿਹਾ ਇੱਥੇ ਇੱਥੇ ਕੁਝ ਹੈ ਨਹੀਂ ਜਿਹੜਾ ਉਹ ਸੰਸਾਰ ਥੇ ਰ ਅਜੇ ਛੱਡੀਆਂ ਹੈ ਮਾਇਆ ਸਰੇ ਮਾਇਆ ਜਿਹੜੀ ਹੈਗੀ ਮਾਇਆ ਜ ਕੁਛ ਵੀ ਛੱਡੀ ਹੁੰਦਾ ਪਰਮਾਨੈਂਟ ਮੰਨਣਾ ਨਹੀਂ ਅਜੀ ਕਹਿੰਦੇ ਆ ਵੀ ਆ ਬਤਾਉਂਦੇ ਰਹਿ ਕਿ ਬੂ ਬਰਨ ਨਾ ਪ੍ਰੋਪਰਟੀ ਬੂ ਬਰਨ ਜਿਵੇਂ ਦੇ ਬੂ ਬਰਨ ਸਾਡੀ ਦਿੱਖ ਲਫ਼ਜ਼ ਗਲਤ ਹੈ ਅਸਰ ਜਣਾ ਲਓ ਗੁਰਬਾਨੀ ਹੈ ਜਿਹਨੂੰ ਅਸੀਂ ਫਿਰ ਕਹਿੰਦਾ ਦਾਸਾ ਨੂੰ ਅਸਰ ਹੈ ਕੀ ਗੁਰਬਾਨੀ ਅਧਰ ਕਹਿੰਦੀ ਹੈ ਉਹ ਆਕਾਸ਼ ਨੂੰ ਚੜ ਰਿਹਾ ਹੈ ਆਕਾਸ਼ ਇੱਥੇ ਰਹਿ ਗਿਆ ਸਿਰ ਨਾਰਾਇਣ ਸਿਰ ਗੁਰ ਸਿਰ ਨਾਰਾਇਣ ਸਿਰ ਗੁਰ ਮਨੁੱਖਿਆ ਜਿਹੜਾ ਭਾਵਨ ਚੜਿਆ ਅੱਥਰ ਨਹੀਂ ਹੋਇਆ ਜੇ ਸਾਡੇ ਸਿਰ ਨਹੀਂ ਉਠਾ ਲਾ ਸਿਰੇ ਕੀ ਮਤਲਬ ਤੇ ਲਾਉਣ ਚ ਉਹਨਾਂ ਨਾਲ ਸ੍ਰੇਸ਼ਟ ਥੇੜ ਸੋ ਫਿਰ ਸਰੇਸ਼ ਹਨ ਇਹਨਾਂ ਨੇ ਅੱਜ ਦੀਆਂ ਕੋਈ ਵੈਰਾਈਟੀਆਂ ਹੋਣਾਂ ਜੋੜੀਆਂ ਵਿਦਵਾਨੋ ਦੇ ਜੋ ਹੋਰ ਬਰਸੋਂ ਦੂਰ ਜੋ ਹੋੜੇ ਵਾਲੀ ਗੱਲ ਹੈ ਇਹਨਾਂ ਨੇ ਉਹ ਦੂਰ ਪਾਈ ਹੋਈ ਜੋ ਮਰਨਾਈ ਜੀ ਦੂਰ ਛੁੱਟੀ ਹੋਈ ਆ ਭੁੱਲੀ ਹੋਈ ਆ ਦੂਰ ਪੁਰਾਣ ਨਾਲ ਭੁੱਲੇ ਆਇਆ ਉਹ ਮੱਲ ਬਣੋ ਬਸਾਰਿਆ ਹੋਇਆ ਛੋੜ ਜਾਏ ਇਸ ਦਾ ਸ਼ਰਮ ਕਰੇ ਜਿਹੜੀ ਜ਼ਿਆਦਾ ਬੇਨਤੀ ਕਰਦਾ ਉਹਦੀ ਤਰਲੀ ਨਹੀਂ ਛੱਡ ਜਾਂਦੀ ਜ਼ਿਆਦਾ ਬੇਨਤੀ ਜਦੋਂ ਬੇਦੋਰੀ ਆਰੀ ਜ਼ਿੰਦਗੀ ਦੇ ਵਿੱਚ ਨੱਠ ਕੇ ਚਲਾ ਜਾਂਦਾ ਜਾ ਰਹੇ ਸਭ ਉਹਦਾ ਹੀ ਹੀ ਉਹਦੇ ਤੇ ਮਤਲਬ ऐसे करके डिप्रेशन हो जाते हैं डिप्रेशन का कारण है कि चला जाएगा सबको पता छाड़ भी सकते हैं नहीं खर्चे बढ़ गए पूरे युद्ध में डिप्रेशन का कारण है साथ। भाई छोड़ जाए तिस का श्रम करे संग सहाय तिस पर हरे जो संग सहाय है उपलब्ध होया है परे को लाया है परे सब से छुटा है ਕੋਆ ਗੱਲ ਨਹੀਂ ਹੋ। ਸੋ ਚੰਦਰ ਸਿੰਘ ਸਾਰੇ ਕੋਏ ਹੈਦਰ ਦਾ ਬਾਏ ਕੋਲ ਖਾਨਾ ਹੋਇਆ ਜੀ। ਆ ਲੋਬਲਾ ਉਹ ਆਈਟਮੀ ਚੀਜ਼ਾਂ ਦਾ ਸਭ ਕੋਲ ਖਾਨੇ ਦਾ ਮਾਲ। ਇਹਦੇ ਵਿੱਚ ਹੀ ਇੱਧਰ ਹੁੰਦਾ ਜਿੱਥੇ ਹੋਵੇ। ਇਹ ਪਰਿਵਰ ਦਾ ਕੋਆੜ ਸਾਰਾ ਵਿੱਚ। ਹਰਦੇਸ। ਜਾਏ ਤਾਂ ਸਭ ਸ਼ਰਮ ਚੀਜ਼ ਆਪਾਂ ਵਸਣ ਦੀ। ਉਹ ਜਿਹੜੀ ਬਰਤਨ ਦੀ ਜੀ ਉਹ ਫਾਲਤੂ ਦਾ ਰਸਤਾ ਪਾੜੇ ਹੁੰਦਾ ਹੈ। ਛੋੜ ਜਾਏ ਤਾਂ ਉਸ ਦਾ ਜ਼ਰੂਰ ਕਰ। ਸੰਕਾ ਸਾਹਿਤਿਸ ਹੈ। ਜੋ ਸੰਕਾ ਵੀ ਹੈ। ਜਿਹਦੀ ਘੜੀ ਨਹੀਂ ਸਕਦਾ। ਉਹ ਵੀ ਸਾਰੇ ਪਰ ਹਰਿਆਣੇ ਮਰ ਭੁੱਲਿਆ ਹੈ ਉਹ ਸਾਰੇ ਹੋਏ। ਚੰਦਨ ਲੇਪ ਉਤਾਰੇ ਧੋਏ। ਜਿਵੇਂ ਗਦਾ ਉਹ ਇਹਨਾਂ ਨੂੰ ਚੰਦਨ ਲੇਪ ਦੀ ਓ ਚਲੋ ਚੰਦਰ ਦਾ ਲੇਪ ਹੈ ਆਦਮੀ ਨੂੰ ਸਮਝੋ ਚੰਦਰ ਦਾ ਜਨ ਲੇਪ ਹੈ ਰੇਤੋਏ ਜਦ ਵਿੱਚ ਆ ਵੀ ਚੰਦਰ ਹੋ ਰਹੇ ਬਸ ਲੇਪ ਕਿ ਇਤਕੀ ਹੈ ਜਿੱਤਿਆਂ ਮੈਂ ਬਰਮਾਤੇ ਵਿਚਾਰ ਧੁੰਨੇ ਚੰਦਰ ਲੇਪ ਸੀ ਓਥੇ ਜਾ ਕੇ ਤਾਂ ਹੋ ਗਿਆ ਸਾਹ ਜਿਹੜੇ ਜਿਹੜੇ ਸੀ ਨਾ ਗੁਰੂ ਘਰ ਚ ਆ ਕੇ ਉਹ ਵੀ ਸੁਣਦੇ ਸੀ ਇਹ ਬੋੜੇ ਆ ਗੱਲਾਂ ਦਾ ਜੀ ਆਡੀ ਬੁੱਕੂ ਦਾਸ ਤੇ ਜਾ ਕੇ ਕੋਈ ਐਸਾ ਬੀਤੀ ਹੁੰਦਾ ਉਤਾਰਨ ਤੋਂ ਕਹਿੰਦਾ ਵੀ ਨਾ ਜਾਣਾ ਸ਼ੁਰੂ ਕਰਕੇ ਸਵੇਰੇ ਰੋਜ਼ ਨਾਉਂਦੇ ਨੇ ਉੱਠ ਕੇ ਸਿੱਖੋ ਆ ਗੁਰਬਾਣੀ ਦਾ ਲੇਵਕ ਗੁਰਬਾਣੀ ਦਾ ਅਸਰ ਵੀ ਉਹ ਚਰਨ ਲੈ ਬਲਾਉਂਦੇ ਨੇ ਉੱਠ ਕੇ ਰੋਜ਼ ਹੋਰ ਕੁਝ ਨਹੀਂ ਹੁੰਦਾ ਉਹ ਪਾਣੀ ਦਾ ਜੋਤਨ ਬਾਅਦ ਸੁਣਿਆ ਅਸੀਂ ਪਾਠ ਕੁਝ ਅਸ਼ਾਣ ਹੋਏ ਕਿ ਉਹ ਟੜਕੇ ਨਾਲ ਦੇ ਰਹੇ ਇਹਨੂੰ ਲਾਉਣ ਬਾਅਦ ਤਾਂ ਆਉਂਦੇ ਨਹੀਂ ਨਾ ਮੰਤਰ ਨਹੀਂ ਤੁਮ ਬੇਸਾਲੇ ਬਾਤ ਕਰਦੇ ਮੇਰਾ ਪਿੰਡਾ ਵੀ ਜੇ ਕਿਤੇ ਅਸਰ ਨਾ ਰਹੇਗਾ ਹੋਵੇ ਇਹਨੂੰ ਲਾ ਦਈਏ ਜੇ ਤਾਂ ਜੋ ਸਮਝਣਾ ਆ ਜਵੇ ਚੰਦਨੀ ਸੁਣਿਆ ਜਾਂਦੀ ਉਹ ਚੰਦਨ ਲੈ ਪਉਤਾਰਣ ਧੋਏ ਅਤਾਰੇ ਦੀ ਉਤਾਰਣ ਧੋਏ ਬਹੁਤ ਜਰ ਮਾਉਦਾ ਚੰਦਰ ਲੇਖ ਉਤਾਰੇੰ ਤੋਂ ਇਹ ਗਰਤੰਭ ਪ੍ਰੀਤ asambhavam ਗਰਤੰਭ ਗਰਤੰਭ ਗਰਤੰਭ ਗਰਤੰਭ ਖੋਤੇ ਨੂੰ ਵੰਦੇ ਗਰਤੰਭ ਪ੍ਰੀਤ ਪ੍ਰੀਤ asambhavam ਉਹ ਜੇ ਆਪਾਂ ਵੀ ਲਈਏ ਚੰਦਰ ਦਾ ਲੇਖ ਹੋਵੇ ਚਲੋ ਉਹ ਵੀ ਤਾਂ ਕਰਦੇ ਉਹਦਾ ਆਪਾਂ ਉਹ ਫਿਰ ਕਿਹੜਾ ਆਂਦਾ ਫਿਰ ਉਹ ਸਵਾਜ ਲੱਗਦਾ ਗਰਤੰਭ ਪ੍ਰੀਤ asambhavam ਉਹ ਚੱਲ ਜੇ ਫਰਕੀਤਾ ਬਾਣੀ ਦਾ ਸੁਣਾ ਆ ਤੈਨੂੰ ਆਵੇ ਤਾਲੀ ਦਿੱਤਾ ਸਵਾਤ ਨੂੰ ਮੜ ਆਪ ਕੋ ਪੁੱਛ ਫਰਮਾਇਆ ਦਾ ਰੰਕ ਕਿਉਂ ਢਾੜਦਾ ਹੈ ਆ ਫਿਰ ਖੇਚ ਚਲੋ ਜੇ ਆਂਦੀ ਸੀ ਮੰਨਿਆ ਕਭ ਸਾਨੂੰ ਨਿਰਮਲ ਬੁੱਤ ਤਰੇ ਤੇ ਨਿਰਮਲ ਬਣਾ ਰਹੀ ਦੇਵੀ ਤਾਂ ਉਹ ਬੁੱਧੀ ਦਾ ਰਹਿੰਦੀ ਜਿਹੜੀ ਬਾਲਬੁੱਤ ਸੀ ਮੈਂ ਇਹ ਲੈ ਕੇ ਆਇਆ ਸੀ ਉਹ ਵੀ ਨਹੀਂ ਅੱਛੀ ਤਰ੍ਹਾਂ ਉਹਦਾ ਅਸਰ ਕੀ ਹੋ ਗਿਆ ਉਹ ਕਿਉਂ ਲਟਿਆ ਉਹਦੇ ਚੇਰੇ ਤੋਂ ਉੱਟੇ ਕੀ ਲੋੜ ਪਈ ਸੀ ਆ ਜਿਹੜੇ ਪੁੱਠੀ ਮੱਠ ਪਰਬੰਦ ਦੀ ਕੀ ਲੋੜ ਪਈ ਸੀ ਤੇ ਨਹੀਂ ਸਿੱਧੀ ਬੰਦੀ ਸੀ ਪੁੱਠੀ ਬੰਨ ਰਹੀ ਸੀ ਸਹਤਾ ਨਹੀਂ ਗੱਲਾਂ ਬਣਦੀ ਜੀ ਮੈਂ ਆ ਨਹੀਂ ਬੁੱਝਦਾ ਛੋ ਇਹ ਕੰਨ ਸੁਣ ਤੇ ਇਹ ਉਹ ਖੋਤੇ ਵਾਲੀ ਗੱਲ ਆ ਇਹ ਕਿੱਦ ਨੂੰ ਲੇਪੋ ਤਾਰੇ ਧੋਏ ਜਾਂਦੇ ਧੂੜ ਉਥੇ ਸਵਾਰ ਹੋ ਗਏ ਉਥੇ ਲਿਟਰ ਵੇ ਇਹ ਉਹ ਨੂੰ ਕਿਆ ਹੋਇਆ ਉਹਨਾਂ ਮੰਦਿਆ ਸਾਹਤਲੇ ਆਇਆ ਪਹੁੰਚ ਨਹੀਂ ਗਏ ਨਾ ਸੰਪੀੜ ਇਸ ਆਗਲ ਅਸਰ ਆਗਲ ਉਸ ਭੇੜੇ ਦੇ ਬਦਸੀ ਉਹ ਐਵੇਂ ਨਹੀਂ ਗੱਲਾਂ ਹੋਤੇ ਉਹਨੂੰ ਤੇ ਉਹਨੇ ਕਈਆਂ ਕੁੱਤੇਾਂ ਬਿਧੈਣ ਦੀ ਬਿਧੈਣ ਨੂੰ ਲੱਗਈ ਹੋਈ ਕੋਤਾ ਕੁੱਤਾ ਵੀ ਲੈ ਕੋਈ ਗੱਲ ਹੁੰਦੀ ਆ ਉਹ ਤਾਂ ਵੀ ਕਿਹੜਾ ਸੀ ਉੱਥੇ ਕਿਹੜਾ ਉਹਦੇ ਗੱਲ ਹੁੰਦਾ ਭਾਗਣਾ ਨਹੀਂ ਹੁੰਦੀ ਫਰੀਦ ਹੈ ਇਹਦੀ ਗੱਲ ਭਸਮ ਉਹ ਕਹਿੰਦਾ ਸੀ ਉਹ ਵੀਰਾਂ ਨੂੰ ਬੋਲਦੇ ਨੇ ਲੋਕੀ ਗੀਤ ਗੀਉਂਦੇ ਨੇ ਓਹ ਤੋਪਾਂ ਹੁਣ ਤਾਂ ਲੈ ਜਾਂਦੇ ਨੇ ਗੁਰਬਾਨੀ ਆ ਗਿਆ ਗੁਰਬਾਨੀ ਆ ਗਿਆ ਮੈਂ ਡਗੂ ਘਟੇ ਉਹਦੇ ਚੇਲੇ ਨੇ ਇੱਥੇ ਗੁਰਬਾਨੀ ਵਾਲੇ ਨੇ ਚੰਦਨ ਦੇ ਜੇ ਤਾਂ ਸੁਣ ਵੀ ਲੈ ਇੰਨਾ ਨਹੀਂ ਆ ਗਏ ਤਾਂ ਇੰਥੋਂ ਜ਼ਿਆਦੇ ਨਾ ਗੇ ਲਾ ਦੋ ਤਰੂ ਉਹ ਖੋਤੇ ਨੇ ਜਿਵੇਂ ਭਸਮ ਨਾਲ ਖੋਤੇ ਦੀ ਪ੍ਰੀਤ ਹੋਦੀ ਓਰ ਨਹੀਂ ਪ੍ਰੀਤ ਆ ਆ ਗਿਆ ਹੋਇਆ ਉਹਨਾਂ ਤੇ ਦੀਆਂ ਥੋੜਾ ਕਹਾ ਦਾ ਬਣ ਜੀ ਕੋਈ ਪਰ ਆਸ ਤੇ ਗੋਗਨਾ ਰੇ ਵੀ ਕਿੱਥੇ ਗਿਆ ਹੈ ਸੀ ਇਹਨੇ ਮਾਰੀਆਂ ਘੱਟੇ ਤੇ ਐਵੇਂ ਇੱਥੇ ਸੜੀ ਕੰਨ ਆ ਕੇ ਕਹਿੰਦਾ ਦਾੜੀ ਥੋੜੀ ਇਹ ਹੈ ਉਹ ਹੈ ਉਹਦੇ ਹੱਥ ਦੇਖੋ ਨਾ ਉਹਦੇ ਕਿੱਥੇ ਕਿੱਥੇ ਲੱਗੀਆਂ ਹੋਈਆਂ ਕੋਈ ਰਸੀ ਉਹਦੇ ਜਗੋਂ ਕਿੱਥੇ ਉਹਦੇ ਘੜੇ ਘੜੇ ਘੱਟੇ ਜਾ ਕੇ ਬਹਿਦੇ ਸੋ ਤੋਂ ਮੱਥੇ ਪਿਆ ਜਾਵੇ ਸੱਤ ਸਮਝੀ ਗੌਰ ਦੀ ਥਾਂ ਕੋਈ ਕੌਣ ਨਾ ਬਾਲੇ ਹੋ ਉਹ ਆ ਦੇਖ ਆ ਤੋ ਪਤਾ ਲੱਗਦੀ ਕੋਈ ਕੀ ਹੈ ਯਾ ਨਾ ਉੱਥੇ ਹੀ ਅਰਥ ਤਾਂ ਇਹ ਕਰੇ ਜੀ ਜਦ ਸ਼੍ਰੀ ਉਹ ਤਾਂ ਸ਼੍ਰੀ ਵੇਦੀ ਤਾਂ ਉੱਥੇ ਕੋਈ ਪ੍ਰਸਰਵਟ ਉਹ ਕਦੇ ਦੇ ਅਸਕਰ ਨਹੀਂ ਹੈ ਸਾਬ ਸਭ ਬੈਦੀ ਹੈ ਉਥੇ ਦਾ ਕੋਮਟਰ ਉਹਦੇ ਮਤਲਬ ਦੇ ਅਰਥ ਹੋਗੇ ਉਥੇ ਕਿ ਮੇਰੇ ਜਦ ਤੱਕ ਇੱਕੋ ਇੱਕ ਖੂਜਾ ਉਹਨਾਂ ਦੇ ਉਹ ਬੁੱਟਾ ਆ ਜੇ ਖੂਜਾ ਬੱਲਿਆ ਬਣ ਉਹ ਬੁੱਟਾ ਅਰਥ ਹੋ ਸਕਦੇ ਨਾ ਹੋਈ ਦੀ ਅੱਜ ਕੋਈ ਮਤ ਹੈ ਨਾ ਉਹਦਾ ਜੇ ਜ਼ਿਕਰਾਂਗੇ ਤਾਂ ਆਪ ਆਪਣ ਬਚੂ ਉਹਦੇ ਕੱਚੀ ਜਾਵੇ ਸਾਨੂੰ ਵੀ ਵਰਕਪਾ ਇਹ ਤਾਂ ਵਰਹਾਣੇ ਦਾ ਗਾਣੇ ਚੰਦ ਕੌੜਾ ਦੇ ਨਿੱਕੇ ਬਹਾਇਆ ਮੋੜਾ ਕਰਕੇ ਦੇਖਿਆ ਸੀ ਚੰਦਨ ਲੈ ਕੇ ਉਤਾਰੇ ਤੋਂ ਇਹ ਗਰ ਦਾ ਪ੍ਰੀਤ ਭਸਮ ਸੰਗ ਹੋਏ ਚੰਦਨ ਲੈ ਉਹ ਖੋਤੇ ਕੋਈ ਚੰਦਨ ਲਿਪਦਾ ਦੇਖਿਆ ਅਜ ਤੱਕ ਖੋਤਾ ਤਾਂ ਹੁੰਦਾ ਹੀ ਨਹੀਂ ਖੋਤਾ ਨੂੰਦਾ ਦਿਖਾਉ ਕੋਤੇ ਨੂੰ ਕੋਈ ਨਾ ਕੋਈ ਚੰਦਰ ਲਾਵੇ ਨਾ ਕੋਈ ਨੂੰ ਨਾ ਗੱਲ ਕੀ ਹੈ ਡੇਡੂਡ ਕੀ ਬਣ ਜਾਂਦਾ ਲਿਰਦਾ ਤਾਂ ਹੈ ਲਿਰਦਾ ਤੁਸੀਂ ਨਾ ਆ ਰਹੇ ਤੇ ਗੋਤਾਂ ਤੁਸੀਂ ਆ ਕੇ ਲੈ ਕੇ ਆਉਂਦੇ ਨਾ ਹਾਂ ਤੁਸੀਂ ਨਾ ਘੋੜਾ ਆਵੇ ਆ ਤੁਸੀਂ ਆ ਤੇ ਸੱਜ ਸਵਾ ਪਾਟਦੇ ਨੇ ਬੰਦੇ ਤੇ ਮਾਣ ਲੈਂਦੇ ਕੋਈ ਨਹੀਂ ਸਾਹੀ ਉਹ ਢੂਲ ਲਾਉਂਦੇ ਨੇ ਘੋਟੇ ਵੀ ਲਾਉਂਦੇ ਨੇ ਆਵੇ ਚੇਲੇ ਵੀ ਭਗਤ ਨਾਲ ਤਰੀਕ ਕਰਦੇ ਜੀ ਢੂੜੀ ਕਰੇ ਸ਼ਾਨ ਹੈ ਨਾ ਚੰਦਨ ਲੇਪ ਉਤਾਰੇ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਈ ਖੋਤਾਂ ਦੀ ਪ੍ਰੀਤ ਭਸਮ ਤੇ ਹੁੰਦੀ ਹੈ ਜਿਹਨਾਂ ਦੀ ਭਸਮ ਨਾਲ ਪ੍ਰੀਤ ਜਿਆਦਾ ਖੋਤੈਂਦੀ ਠੀਕ ਹੈ ਗੁਰੂ ਵਸਰੀ ਨੇ ਸਾਰੀ ਸਿੱਖਿਆ ਦਿੱਤੀ ਘਰ ਉਹ ਚੰਦਨ ਦਾ ਲੇਪ ਚਾੜਿਆ ਐਡਾ ਉਹ ਤਾਂ ਧੋਕ ਲਾਤਾ ਸ੍ਰੀ ਚਾਦੁਰ ਉਤਨੀ ਉਸਵਾ ਜਿਹੜੀ ਸੀ ਉਹਨਾਂ ਦਾ ਚੇਲਾ ਹੋ ਗਿਆ ਜਿਹਦਾ ਉਹ ਖੋਤਾ ਸੀ ਹੋ ਗਿਆ ਸਿੱਧਿਆ ਗੱਲ ਹੈ ਸਿੱਧਿਆ ਉਹ ਨੂੰ ਕਰ ਆਪ ਚੰਦਰ ਦਾ ਲੇਭ ਦਿੱਤਾ ਕਦੀ ਦਿੱਤਾ ਉਹ ਥਰੀ ਚੰਦੂ ਸਿੱਧਾ ਕਹਿ ਰਹੇ ਨੇ ਗੱਲ ਹੈ ਅੰਧ ਮੈਂ ਪਤ ਤੇ ਨਾਨਕ ਕਾਢ ਲਿਓ ਪ੍ਰਭ ਦਿਆ ਅੰਤਕੂਪ ਅੰਤਕੂਪ ਅੰਤਕੂਪ ਵਿੱਚ ਪਤਾ ਨਹੀਂ ਅੰਤਕੂਪ ਤੇਰਾ ਖੂਨ ਅੰਤਕੂਪ ਉਹਦਾ ਜਿਹੜੇ ਖੂਨ ਵਿੱਚ ਪਤਾ ਨਹੀਂ ਹੋਵੇ ਕੀ ਹੈ ਥੱਲੇ ਨਾ ਕੋਈ ਜਾਂਦਾ ਹੋਵੇ ਥੋੜੀ ਜਿਹੀ ਤਕਦੀਰ ਕੀ ਹੈ ਅੰਤਕੂਪ ਮੇਰੇ ਖੂਨ ਬਾਰੇ ਕੋਈ ਗਿਆਨ ਨਾ ਹੋਵੇ ਥੱਲੇ ਕੀ ਹੈ ਕਿੰਨਾ ਡੇਰਾ ਕਿੱਡਾ ਬੜਾ ਹੈ ਤੱਕ ਅੰਤਕੂਪ ਅੰਤਕੂਪ ਪਤਨ ਦੇ ਘੂਰ ਸੋਕਾਰ ਨੂੰ ਬੜਾ ਧਿਆਨ ਕਰਨਾ ਸੁਖੇ ਘੂਰ ਨੂੰ ਕਹਿੰਦੇ ਹਾਂ ਹਾਂ ਅੰਧਕੂਪੇ ਵਿੱਚ ਪਤਿਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਉ ਕਾਢ ਲਿਓ ਪ੍ਰਭ ਦਿਆਉ ਕਰੋ ਇਹ ਸਾਰੇ ਇਹ ਜਿਹੇ ਦੇ ਵਿੱਚ ਇਹ ਪਾਸ ਮਨ ਕੋਈ ਨਾਨਕ ਕਾਢ ਲਿਓ ਪ੍ਰਭ ਦਿਆ ਨਾਨਕ ਤੁਧਾ ਹੈ ਪ੍ਰਭ ਦਿਆਲ ਨਾਨਕ ਤੁਧਾ ਜਿ ਵਢ ਲੋ ਐਤ ਕੂਪ ਤੇ ਬਿਚੇ ਦੇ ਰੇਤ ਅੱਤੇ ਫੂਟੇ ਬਿਚੇ ਲੋ ਉਪਰ ਜੇ ਹਜੇ ਸਾਰੀ ਪਰ ਹੈ ਨਾ ਕਿ ਵਿੱਚ ਹੀ ਹੋਵੇ